ਇਹਨਾਂ ਨੇ ਕਹਿ ਦਿੱਤਾ ਵਾ ਜੋ ਕਬੀਰ ਕਹਿੰਦੇ ਨੇ ਕਬੀਰ ਮੋਹ ਮਰਨੇ ਕਾ ਚਾਹ ਕਿਹ ਜਦੋਂ ਸਾਹਮਣੇ ਸਮਾ ਆਇਆ। ਆਖਰੀ ਸਮੇਂ ਤੇ ਇਹ ਮਹਾਪੁਰਸ਼ਾਂ ਦੀਆਂ ਵਿਚਾਰਾਂ ਨੇ ਪਰ ਸਤਗੁਰੂ ਆ ਜਾਂਦੀਆ। ਕਹਿੰਦਾ ਮੈਨੂੰ ਚਾ ਜੇ ਕਿਤੇ ਆਵੇ ਸਾਹਮਣੇ ਮੈਂ ਸਵਾਗਤ ਕਰਾਂਗਾ ਤੇਰਾ। ਮੌਤ ਨੂੰ ਮੌਤ ਨੂੰ ਠੁਕਰਾ ਦਿੱਤਾ ਇਹਨਾਂ ਮਹਾਪੁਰਸ਼ਾਂ ਨੇ। ਜਿਹੜੇ ਗੁਰੂ ਨਾਲ ਜੁੜੇ ਰਹੇ। ਮੈਂ ਅਰਜੀ ਕੀਤਾ ਸੀ ਕਿ ਗੁਰਸਿੱਖ ਦੀ ਮੌਤ ਉਦੋਂ ਹੁੰਦੀ ਹੈ ਜਦੋਂ ਗੁਰੂ ਨਾਲੋਂ ਟੁੱਟਦਾ। ਜਿੰਨਾ ਚਿਰ ਗੁਰੂ ਚਰਨਾਂ ਨਾਲ ਜੁੜਿਆ ਰਿਹਾ ਹੈ ਮੌਤ ਕੋਲੋਂ ਮੌਤ ਨੂੰ ਮਖੌਲ ਕਰਦੇ ਸੰਸਾਰ ਤੋਂ ਗਏ ਨੇ ਇਹ ਹੀ ਕਾਰਨ ਹੈ ਕਿ ਇਹ ਮਰਨੇ ਨੂੰ ਮੰਨਦੇ ਨਹੀਂ ਇਹ ਮਰਨੇ ਨੂੰ ਮਰਨ ਤੋਂ ਡਰਦੇ ਨਹੀਂ ਇਹ ਦੁੱਖ ਨੂੰ ਦੁੱਖ ਨਹੀਂ ਕਹਿੰਦੇ ਸੰਤ ਖਜਾਨ ਸਿੰਘ ਦੇ ਸਾਹਮਣੇ ਆਪਣੇ ਜੀਵਨ ਵਿੱਚ ਕਈ ਪਰੇਸ਼ਾਨੀਆਂ ਆਈਆਂ ਪਰ ਉਹਨਾਂ ਨੇ ਦੁੱਖ ਨੂੰ ਦੁੱਖ ਨਹੀਂ ਮੰਨਿਆ ਸੰਤ ਜੀ ਜਿੱਥੇ ਬੈੰਦੇ ਸਨ ਬਸ ਉੱਥੇ ਹੀ ਮੇਲਾ ਲੱਗ ਜਾਂਦਾ ਸੀ ਚਾਰ ਚਫੇਰੇ ਸਾਰਿਆਂ ਨੂੰ ਹਸੀ ਜਾਂਦਾ ਤੇ ਹਸਾਈ ਜਾਂਦਾ ਜੇ ਜੀਵਨ ਵੇਖਿਆ ਖਜ਼ਾਨ ਸੁਰੇ ਫੁੱਲ ਵਰਗਾ ਜੀਵਨ ਵੇਖਿਆ ਤੇ ਸੰਤ ਖਜ਼ਾਨ ਸਿੰਘ ਜੀ ਸਾਹਿਬ ਹਰ ਵਕਤ ਤੇ ਸਤਗੁਰਾਂ ਦੇ ਨਾਲ ਇੰਨੀ ਨੇੜਤਾ ਕੋਈ ਨਹੀਂ ਕਰ ਸਕਿਆ ਜਿੰਨੀ ਇਹਨਾਂ ਦੁਆਪਰਾਵਾਂ ਦੀ ਹੋਈ ਹੈ ਤੇ ਜਿੰਨਾ ਮਾਣ ਤੇ ਸਤਕਾਰ ਗੁਰੂ ਘਰ ਵਿੱਚੋਂ ਤੇ ਗੁਰੂ ਦਰ ਤੋਂ ਇਹਨਾਂ ਨੂੰ ਮਿਲਿਆ ਨਾਮਤਾਰੀ ਪੰਥ ਵਿੱਚੋਂ ਟਾਪ ਵੇਖਿਆ ਇਹਨਾਂ ਦਾ ਚੀਮਨ ਇਸ ਤਰੀਕੇ ਨਾਲ ਜੀਵਨ ਬਚੀਤ ਕੀਤਾ ਤੇ ਆਖਰ ਸਮਾਂ ਤੇ ਆਉਣਾ ਹੀ ਸੀ ਨਾ ਲੋਪ ਹੋਣ ਦਾ ਸਮਾਂ ਆਇਆ ਐਵੇਂ ਛੋਟਾ ਜਿਹਾ ਬਹਾਨਾ ਬਣਿਆ ਕਿ ਉਹਦੇ ਨਾਲ ਕੁੱਲੇ ਨੇ ਦੱਸਿਆ ਕਿ ਮੈਂ ਜਾ ਕੇ ਦਰਸ਼ਨ ਕੀਤਾ ਤੇ ਹਾਲਤ ਚੰਗੀ ਨਹੀਂ ਸੀ ਤੇ ਮੈਂ ਪੁੱਛਿਆ ਚਾਚਾ ਜੀ ਸਰੀਰ ਠੀਕ ਨਹੀਂ ਜਾ ਸਾਰੇ ਉਦਾਸ ਬੈਠੇ ਹੋਏ ਉੱਥੇ ਵੀ ਹੱਸ ਕੇ ਗੱਲ ਕੀਤੀ ਹੈ ਤੇ ਤਬਦੀਲੀ ਹੁੰਦੀ ਰਹਿੰਦੀ ਹੈ ਸੰਸਾਰ ਵਿੱਚ ਰਹਿ ਕੌਣ ਗਿਆ ਮੈਂ ਕਹਿੰਦਾ ਇੰਨਾ ਨ ਡਰ ਮੌਤ ਤੋਂ ਮੌਤ ਨੇੜੇ ਹੋਵੇ ਤੇ ਮੌਤ ਤੋਂ ਡਰਨਾ ਇਹ ਗੁਰੂ ਆਲਿਆਂ ਦਾ ਕੰਮ ਹੈ ਸਤਿਗੁਰੂ ਆਲਿਆਂ ਦਾ ਕੰਮ ਹੈ ਮੈਂ ਮੌਤ ਤੋਂ ਡਰਦੇ ਨਹੀਂ ਤੋਂ ਮੈਂ ਅਰਜ ਕੀਤਾ ਸੀ ਅੱਜ ਕਬੀਰ ਦੇ ਸ਼ਬਦ ਤੋਂ ਕਹਿੰਦੇ ਨੇ ਜਿਹ ਮਰਨੇ ਸਭ ਜਗਤ ਤਰਸਿਆ ਜਿਹਦੇ ਜਿਸਮ ਮੋਟ ਕੋਲੋਂ ਸਾਰੀ ਦੁਨੀਆ ਡਰਦੀ ਰਹੀ ਐ ਤੇ ਮਰਦੀ ਆਈ ਕਬੀਰ ਮਰਤਾ ਮਰਤਾ ਜਗ ਮੂਆ ਜਗ ਕੌਣ ਮੂਆ ਕਹਿੰਦੇ ਨੇ ਬੁੱਤ ਤੇਰੀ ਗੱਤ ਤੂੰ ਪਾਈ ਰੇ ਬੰਸ ਸੰਸਾਰ ਅੰਧ ਗਹਿਰਾ ਚੌਜ ਸਪਸਰਿਓ ਹੈ ਚਮ ਜੇਵਰਾ ਕਹਿੰਦੇ ਨੇ ਇੱਕ ਮਿੱਤ ਫੜੇ ਪਰ ਕਮਤਾ ਮੂਏ ਕੱਪੜੇ ਨਾਲ ਆਹ ਜਾਈ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗੱਤ ਇਹਨੇ ਨਾ ਪਾਈ ਤੇ ਧਰਮ ਸੰਚ ਸੰਚ ਰਾਜੇ ਮੂਏ ਕੰਚਨ ਭਾਰੀ ਤੇ ਬੇਦ ਪੜੇ ਪਰ ਪੰਡਤ ਰੂਪ ਦੇਖ ਦੇਖ ਨਾਲੀਏ ਸਾਰੀ ਦੁਨੀਆ ਵਰਦੀ ਪਈਏ ਫਿਰ ਕਹਿੰਦੇ ਨੇ ਕਬੀਰ ਬੈਦ ਮੂਆ ਰੋਗੀ ਮੂਆ ਸਭ ਸੰਸਾਰ ਮਰਦਾ ਹੀ ਆਇਆ ਅਜ ਤੱਕ ਕੋਈ ਵੀ ਨਹੀਂ ਜਿੰਦਾ ਕੋਈ ਵੀ ਹੋਵੇ ਸਰੀਰ ਕਰਕੇ ਸਾਰੀ ਸਭ ਮਰੇਲੇ ਅੱਜ ਤੱਕ ਇਹ ਮਰਜ਼ਾਦਾ ਨਹੀਂ ਟਲੀ ਕਬੀਰ ਬੈਦਮੂਆ ਰੋਗੀ ਬੂਆ ਮੂਆ ਸਭ ਸੰਸਾਰ ਏਕ ਕਬੀਰਾ ਨਾਮੂਆ ਇਹ ਰਾਹੀ ਰੋਮੜ ਹਾਰ ਕਹਿੰਦਾ ਮੈਂ ਨਹੀਂ ਮਰੇਗਾ ਸੰਸਾਰ ਤੋਂ ਅਰ ਇਹ ਕੀਤੀ ਸੀ ਗੁਰੂ ਨਾਨਕ ਕਹਿੰਦੇ ਕਹਿੰਦੇ ਹਉ ਨਾਮੂਆ ਮੇਰੀ ਮੋਈ ਬੁਲਾਏ ਉਹ ਨਾਮੂਆ ਜੋ ਰਹਾ ਨਈ ਮਰਦਾ ਸੰਸਾਰ ਤੋਂ ਛੜਤਰ ਦੀ ਲਈ ਹੈ ਇਹ ਲਿੰਤਾ ਹੋ ਰਹੀ ਹੈ ਇੱਕ ਪਾਸੇ ਕੋਈ ਆ ਰਿਹਾ ਇੱਕ ਜਾ ਰਿਹਾ ਬਸ ਇੰਨਾ ਕੀ ਸੰਸਾਰ ਦੀ ਮਰਜ਼ਾਦਾ ਹੈ ਇਸ ਵਾਸਤੇ ਕਬੀਰ ਕਹਿੰਦੇ ਨੇ ਹੁਣ ਇਸ ਤਰ੍ਹਾਂ ਬਣਿਆ ਮਨ ਵਿੱਚ ਇਹ ਗੱਲ ਆਈ ਹੈ ਹੁਣ ਜਦੋਂ ਜਾਣਕਾਰੀ ਹੋ ਗਈ ਆ ਨਾ ਰਾਮ ਦੀ ਤੇ ਮੌਤ ਦੀ ਇਹਦੀ ਜਦੋਂ ਜਾਣਕਾਰੀ ਹੋਈ ਤੇ ਮਨ ਵਿੱਚ ਆਨੰਦ ਹੀ ਆਨੰਦ ਪ੍ਰਗਟ ਹੋ ਗਿਆ ਖੁਸ਼ੀਆਂ ਪੈਦਾ ਹੋਈਆਂ ਜਿਹੜੀਆਂ ਭਾਈ ਨੰਦ ਲਾਲ ਨੇ ਆਖੀਆਂ ਸਨ ਕਬੀਰ ਕਹਿੰਦੇ ਨੇ ਕਹੋ ਕਬੀਰ ਮਨ ਭਇਆ ਅਨੰਦਾ ਮਨ ਵਿੱਚ ਆਨੰਦ ਹੋਇਆ ਅਨੰਦ ਪ੍ਰਗਟ ਹੋਇਆ ਭੌਤ ਨੂੰ ਵੇਖ ਕੇ ਇਹ ਨਹੀਂ ਸੀ ਪਈ ਕੋਈ ਪਦਾਰਥ ਲੈ ਗਿਆ ਭਈ ਉਹਨੂੰ ਕ੍ਰਾ ਪ੍ਰਸ਼ਾਦ ਛਕਣ ਵਾਸਤੇ ਮਿਲ ਗਿਆ ਸੀ ਤਾਂ ਐਸੀ ਕੋਈ ਗੱਲ ਨਹੀਂ ਸਿਰਫ ਮੌਤ ਦੀ ਜਾਣਕਾਰੀ ਹੋਈ ਆ ਇਹ ਸ਼ਬਦ ਕਹਿੰਦਾ ਮੌਤ ਦਾ ਜਦੋਂ ਗਿਆਨ ਹੋਇਆ ਮਰਨੇ ਦਾ ਅੰਦਰ ਹੋ ਗਿਆਨ ਹੋ ਗਿਆ ਹੁਣ ਜਾਣਕਾਰੀ ਹੋਈ ਆ ਤੇ ਹੁਣ ਬਿਲਕੁਲ ਮੇਰੇ ਮਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ yaar mari chake jinniyan takiyan yaar mari jaan jinniyan takiyan ਮਰ ਬੰਨ ਕੱਤੇ ਇਸ ਨਾਮ ਦਾ ਅਰਦਾਸ ਤੇ ਨਾਮ ਕਰਦਾ ਮਰ ਬੰਨ ਕੱਤੇ ਨਾਮ ਕਰਦਾ ਸਾਧ ਸੰਗਤ ਜੀ ਇਹਨਾਂ ਸ਼ਬਦਾਂ ਨਾਲ ਹੀ ਖਿਮਾ ਦੇ ਚਾਚਕਾ ਸਤਿ ਸ੍ਰੀ ਅਕਾਲ ਹੁਣ ਹੁਕਮ ਅਨਸਾਰ ਨਿਤਨੇਮ ਦੀ ਅਰਦਾਸ ਹੋਵੇਗੀ ਸਾਰੀ ਸਾਧ ਬੈਠ ਕੇ ਨਾਮ ਜਪੋ